ਸ਼ਲੋਕ ਮਹੱਲਾ ਤੀਜਾ ਕੇ ਦਾਰਾ ਰਾਗਾਂ ਵਿੱਚ ਜਾਣੀਏ ਭਾਈ ਸ਼ਬਦੇ ਕਰੇ ਪਿਆਰ ਸਤ ਸੰਗਤੀ ਸਿਉ ਮਿਲਦੋ ਰਹੇ ਸੱਚੇ ਤਰੇ ਪਿਆਰ ਕੇ ਦਾਰਾ ਰਾਗਾਂ ਵਿੱਚ ਜਾਣੀਏ ਭਾਈ ਰਾਗਾਂ ਵਿੱਚ ਜਾਣਿਆ ਰਾਗਾ ਬੋਵ ਚਾਨਾ ਇਹ ਸਾਰੇ ਰਾਗਾਂ ਦੀ ਸਾਰੀ ਗੁਰਬਾਣੀ ਤੇ ਜਾਣਿਆ ਦਾਰਾ ਇਹ ਦਾਰਾ ਹਦਾਰਾ ਕੀ ਹੁੰਦੀ ਹੈ ਜੋ ਦਾੜਾ ਹੋਇਆ ਜੇ ਹੁਕਮ ਵਿੱਚ ਹੈ ਖਸੂਰ ਦੇ ਭਾਣੇ ਜਿਹਾ ਦਾੜਾ ਹੈ ਤੇ ਜਾਨੀ ਹੈ ਭਾਈ ਸ਼ਬਦੇ ਕਰੇ ਪਿਆਰ ਗੁਰਬਾਣੀ ਨੂੰ ਪਿਆਰ ਕਰੇ ਹੁਕਮ ਵਿੱਚ ਤਾਹੀ ਰਹਾ ਜਾ ਸਕਦਾ ਜੇ ਹੁਕਮਨਾਰ ਨੂੰ ਉਹ ਬੰਦੇ ਖੁਸ਼ੀ ਖੁਸ਼ੀ ਜੇ ਉਹ ਮਿੱਠਾ ਲੱਗੇ ਠਾਣਾ ਮਿੱਠਾ ਲੱਗੇ ਤਾਂ ਦਾ ਉਹ ਸਤ ਸੰਗਤ ਸਿਉਂ ਮਿਲਦੋ ਰਹਿ ਸਤ ਸੰਗਤ ਦੇ ਨਾਲਿਲਕੇ ਰਹਿ ਸੱਚੇ ਤਰੇ ਪਿਆਰ ਸੱਚ ਨਾਲ ਪਿਆਰ ਰੱਖੇ ਚੜਾਣ ਪਿਆਰ ਬਣਿਆ ਰਹੇ ਹਾਂਜੀ ਤੇ ਕੇਦਾਰਾ ਫਿਰ ዳਰਾ ਔਰ ਕੇਦਾਰਾ ਦੋ ਸ਼ਬਦ ਹਨ ਜੀ ዳਰਾ ਟੈਨ ਆ ਰਾਬਾ ਦੇ ਵਿੱਚ ਜਿਵੇਂ ਬਲਾਵਲ ਜਿਹੜਾ ਹੈਗਾ ਉਹਦਾ ਵੀ ਅਰਥ ਕੀਤਾ ਹੈ ਬਲਾਵਲ ਖਾਣ ਬੁਲਾਇਆ ਬੁਲੇ ਜਿਆਦਾ ਉਹ ਬਲਾਵਲ ਠੀਕ ਹੈ ਜੀ ਇਹ ਮਾਰੂ ਰਾਗ ਦੀ ਵਾਰ ਹੈ ਵੈਸੇ ਪਰ ਇਹਦੇ ਕੇਦਾਰਾ ਦਾ ਜ਼ਿਕਰ ਆ ਰਿਹਾ ਜੀ ਕੇਦਾਰਾ ਦਾ ਜ਼ਿਕਰ ਕਰਤਾ ਉਹਨਾਂ ਨੇ ਠੀਕ ਹੈ ਫਿਰ ਇਹ ਗੁਰਮਤਰੂ ਕੇਦਾਰਾ ਕਹਾਂਗੇ ਜੀ ਲੋਕਾਂ ਇੱਕ ਬੁੱਧੀ ਨੂੰ ਕੇਦਾਰਾ ਕਹਾਂ ਠੀਕ ਹੈ ਜੀ ਕਿ ਵਿਵੇਕ ਬੁੱਧੀ ਜੋ ਹੈ ਉਹ ਬਾਦ ਗ੍ਰੰਥ ਵਿੱਚ ਸਾਰੇ ਸ਼ਬਦਾਂ ਵਿੱਚੋਂ ਪੜ੍ਹ ਕੇ ਖੋਜ ਕੇ ਲੱਭਣੀ ਜੀ ਆਪਣੀ ਬੁੱਧ ਸੀ ਹਾਂ ਇਹ ਤਾਂ ਬਣਗੀ ਹੈ ਜੀ ਵਿੱਚੋਂ ਮਲ ਕੱਟੇ ਆਪਣੀ ਕੁਲਾਂ ਦਾ ਕਰੇ ਉਧਾਰ ਗੁਣਾ ਕੀ ਰਾਸ ਸੰਗਰਹਿ ਆਫਗਣ ਕੱਢੇ ਵਿਡਾਰ ਆਪਣੇ ਮਨ ਵਿੱਚੋਂ ਆਪਣੀ ਮਨਾਲ ਕਰਦੇ। ਤਾਂ ਮੈਂ ਬੁੱਧੀ ਬਣੂ। ਜਿੰਨਾ ਜਿੰਨ ਮਨ ਦੇ ਵਿੱਚੋਂ ਮੈਲ ਨਹੀਂ ਕੱਢਦੀ ਕਿਦਾਰਾ ਕਰੀ ਅਸੀਂ। ਕੋਲਾਸਾ ਕਰੇਦਾਰ ਫਿਰ ਬਾਕੀ ਕੋਲਾਸਾ ਦਾ ਹਾਰ ਕਰੂ ਫਿਰ ਬਾਕੀ ਮਤਾਂ ਨੂੰ ਗਿਆਨ ਦਊ। ਪਰ ਸਾਰੀਆਂ ਮਤਾਂ ਨੂੰ ਗਿਆਨ ਦੇ ਰਹੀ ਹੈ। ਉਦਾਰਤਾ ਲਈ ਉਹਨਾਂ ਦਾ। ਉਹਨਾਂ ਦਾ ਬੁਰਾ ਨਹੀਂ ਕਰ ਰਹੀ। ਉਹ ਬੁਰੀਆਂ ਮਤਾਂ ਦਾ ਭਲਾ ਕਰ ਰਹੀ ਹੈ। ਅਧੀਦਾ ਬੁਰੇ ਦਾ ਕੋਲਾਸਾ। ਉਹਨਾਂ ਦੀ ਰਾਸ ਸੰਗਰ ਉਹਨਾਂ ਦੀ ਜਿਹੜੀ ਰੱਖੀ ਹੈ ਇਹਦਾ ਸੰਗਰ ਕਰਦੀ ਹੈ। ਇਹਨੂੰ ਇਕੱਠੇ ਕਰਦੀ ਹੈ। ਆਵਰ ਕੰਡੇ ਵਿਟਾਰ ਆਪ ਆਪਣਾ ਨੂੰ ਹਾਰ-ਮਾਰ ਕੇ ਵਾਰ ਕੰਦੀਆਂ ਵਿੱਚੋਂ ਪਰੇਮਾਲਦੀ ਤੇ ਗੁਣ ਇਕੱਠੇ ਕਰਦੀ ਠੀਕ ਹੈ ਜੀ ਧਾਰਾ ਗੁਰੂ ਨਾ ਛੋੜੇ ਆਪਣਾ ਦੂਜੇ ਨਾਲ ਧਰੇ ਪਿਆਰ ਮਿਲਿਆ ਉਹਦੇ ਨੂੰ ਨਹੀਂ ਜਾ ਸਕਦਾ ਗੁਰੂ ਨੇ ਛੋੜੇ ਆਪਣਾ ਆਪਣਾ ਗਿਆਨ ਨਾ ਛੱਡੇ ਗੁਰਮਤਿ ਨਾਲ ਤੇ ਅੱਗੇ ਗੁਰਮਤਿ ਨੂੰ ਕਿਸੇ ਕੀਮਤ ਤੇ ਗੁਰੂ ਕੀ ਮੱਤ ਨੂੰ ਛੱਡੇ ਦੂਜੇ ਨਾਲ ਤਰੇ ਪਿਆਰ ਦੂਜੀ ਮਤ ਨਾਲ ਪਿਆਰ ਨਾ ਕਰੇ ਆਪਣਾ ਗੁਰਮਤਿ ਦਾ ਗਿਆਨ ਛੱਡੇ ਨਾ ਦੂਜਾ ਹੋਏ ਹੋਰ ਕੋਈ ਗਿਆਨ ਤਾਂ ਬਚਾਓ ਹੋ ਸਕਦਾ ਹੋਰ ਕਿਸੇ ਗਿਆਨ ਨਾਲ ਪਿਆਰ ਨਾ ਕਰੇ ਹਾਂਜੀ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਤੇ ਤੇਰੇ ਡਰਨਾ ਹੈ ਗੁਰ ਕੇ ਸ਼ਬਦ ਸੰਤੋਖੀਆ ਨਾਨਕ ਵਿਕਸ਼ਾ ਨਾਹੀਂ ਸਾਗਰ ਦੇ ਖੂ ਡਰ ਮਰੂੰ ਜਦ ਭਾਗ ਸਾਗਰ ਵੱਲ ਨੂੰ ਚਾਖਦਾ ਮੈਂ ਮੈਨੂੰ ਡਰ ਆਉਂਦਾ ਹੈ ਤੋ ਬਾ ਹੁਣ ਮਰਿਆ ਹੁਣ ਮਰਿਆ ਮਰਨ ਦਾ ਡਰ ਜਦ ਹੀ ਖੜਾ ਹੋ ਜਾਂਦਾ ਜੇ ਤੇਰੀ ਪੈਜ ਚ ਚਲਾ ਜਾਣਾ ਤੇਰੇ ਹੁਕਮ ਦੇ ਵਿੱਚ ਚਲਾ ਜਾਣਾ ਦਾ ਤੇਰੇ ਦਰ ਤੇ ਰਹਿਣਾ ਫਿਰ ਸਾਰੇ ਡਰ ਚਕੇ ਜਾਂਦੇ ਨੇ ਪੈ ਤੇਰੇ ਦਰ ਦਾ ਹੈ ਤੇਰੇ ਦਰ ਵਿੱਚ ਕੋਈ ਪੈ ਨਹੀਂ ਆਉਂਦੀ ਉਦੋਂ ਮੈਂ ਸਮਾਂ ਮੇਰੇ ਹੋ ਜਾਂਦੇ ਤੇਰੇ ਪੈ ਗਏ ਕਿ ਮੇਰੇ ਪੈ ਉਹ ਭਗਵਾਗਦ ਦੇ ਵਿੱਚ ਜਦ ਦ੍ਰਿਸ਼ਟੀ ਜਾਂਦੀ ਹੈ ਜਾਂ ਸੁਰਤ ਜਾਂਦੀ ਹੈ ਉਦੋਂ ਡਰ ਲੱਗਦਾ ਗੁਰਕੇ ਸ਼ਬਦ ਸੁਣ ਗੁਰਕੇ ਉਪਦੇਸ਼ ਨੇ ਗੁਰਬਾਣੀ ਨੇ ਐਸਾ ਸੰਤੋਖ ਪੈਦਾ ਕੀਤਾ ਹੈ ਮਾਯਾ ਦੀਪੋਖਿਆ ਜੀ ਖਤਮ ਕੀਤੀ ਹੈ ਨਾਕ ਵਿਗਸਾ ਨਹੀਂ ਮਾਇਆ ਦੀ ਛਹੀ ਨਹੀਂ ਹੈ ਮਾਇਆ ਦੀ ਪ੍ਰਾਪਤੀ ਦੀ ਕੋਈ ਮਾਇਆ ਖੁਸ਼ੀ ਨਹੀਂ ਮਿਲਦੀ ਦੀ ਖੁਸ਼ੀ ਹੈ ਸੰਤੋਖ ਦੇ ਬਾਅਦ ਨਾਮ ਦੀ ਖੁਸ਼ੀ ਹੁੰਦੀ ਹੈ ਮਾਇਆ ਦੀ ਪ੍ਰਾਪਤੀ ਦੀ ਕੋਈ ਖੁਸ਼ੀ ਨਹੀਂ ਹੁੰਦੀ ਹੋਜੀ ਕਹਿਣ ਦਾ ਭਾਵ ਕਿ ਦੋ ਪਦਾਰਥ ਮਿਲ ਗਏ ਸੰਤੋਖਣ ਨਾਲ ਤੇ ਹੁਣ ਨਾਮ ਪਦਾਰਥ ਮਿਲਣ ਦੀ ਖੁਸ਼ੀ ਹੈ ਨਾਮ ਪਦਾਰਥ ਸੰਸਾਰ ਚ ਹੁੰਦਾ ਹੀ ਨਹੀਂ ਇਤੋ ਤਾਂ ਆਹੀ ਮਿਲਦਾ ਹੁੰਦਾ ਵਿਰਾਸੇ ਮਿਲਦਾ ਹੁੰਦਾ ਜੇ ਵਿਰਾਸ ਮਿਲ ਗਿਆ ਪੈਸੇ ਨਾਲ ਵਿਰਾਸ ਮਿਲਦਾ ਨਹੀਂ ਮਾਇਆ ਦੀ ਭੁੱਖ ਨਹੀਂ ਰਹੀ ਨਾ ਤਾਂ ਹੀ ਟੱਕਿਆ ਗਿਆਨ ਜਿਹੜਾ ਨਾਮ ਨਾ ਉਹਦੇ ਨਾਲ ਬਖਸ਼ਿਆ ਮਨ ਖੁਸ਼ ਹੋਇਆ ਗਿਆਨ ਜਿਹੜਾ ਆਤਮ ਗਿਆਨ ਉਹਦੇ ਨਾਲ ਹੋਇਆ ਠੀਕ ਹੈ ਜੀ ਮਹੱਲਾ ਚੌਥਾ ਚੜ ਬੋਹਿਥੈ ਚਾਲਸੋਂ ਸਾਗਰ ਲਹਿਰੀ ਦੇ ਠਾਕ ਨ ਸੱਚੈ ਜੇ ਗੁਰ ਧੀਰਕ ਦੇ ਜਾ ਤੇ ਚੜ ਕੇ ਪੇ ਥਲਤਾ ਦੇ ਸਾਗਰ ਲਹਿਰੀ ਤੇ ਸਾਗਰ ਦੇ ਵਿੱਚ ਲਹਿਰਾਂ ਦੇ ਉੱਠ ਲਈਆਂ ਨੇ ਠਾਕ ਨ ਬੋਹਿਤ ਹੈ ਸੱਚੇ ਬੋਹਿਤੇ ਇਹ ਲਹਿਰਾਂ ਨਹੀਂ ਰੋਕ ਸਕਦੀਆਂ ਸਾਦਰਦੀਆਂ ਜੇ ਗੁਰ ਧੀਰਕ ਦੇ ਜੇ ਗੁਰ ਤੇ ਮਿਹਰ ਰੱਖੇ ਜੇ ਦੋਲਣ ਤੇ ਪ੍ਰਭੂ ਰਖੇ ਹੱਥ ਦੇਕੇ ਤੇ ਲਹਿਰਾਂ ਨਹੀਂ ਰੋਕ ਸਕਦੀਓ ਸੰਸਾਰ ਦੀਓ ਸੰਸਾਰ ਦੇ ਵਿੱਚ ਆਪਸਾਂ ਲਾਉਜ਼ ਆਉਂਦੇ ਰਹਿਣਗੇ ਸੰਸਾਰ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਪਰ ਬੇੜਾ ਅੱਗੇ ਅੱਗੇ ਜਾਂਦਾ ਰਹੂਗਾ ਸੱਚੀ ਪੜ੍ਹਾਈ ਸੱਚ ਦਾ ਜਿਹੜਾ ਪ੍ਰਚਾਰ ਅੱਗੇ ਜਾਂਦਾ ਰਹੂ ਰੋਕ ਨਹੀਂ ਸਕਦੇ ਲੋਕ ਹਾਂਜੀ ਤਿਤਦਰ ਜਾਏ ਉਤਾਰਿਆ ਗੁਰਦੀਸੇ ਨਾਨਕ ਨਜ਼ਰੀ ਪਾਈ ਹੈ ਦਰਗਾਹ ਮਾਨ ਉਹ ਉੱਥੇ ਜਾ ਕੇ ਉਹਦਾ ਤਾਰ ਦਿੰਦਾ ਧੀਸਾ ਗੁਰ ਸਾਹਿਬ ਦਾਨ ਸਾਬਦਾਨ ਨੇ ਸਾਬਦਾਨ ਜਾਗਦੀ ਉਹ ਦੁਰਗਾ ਜੀ ਜਿਹੜਾ ਸਾ ਲੈ ਛੱਡ ਦਿੰਦਾ ਕੋਈ ਕੋਈ ਕੋਈ ਖਤਰਾ ਨਹੀਂ ਹੈ ਨਾਨਕ ਨਜ਼ਰੀ ਪਾਈ ਹੈ ਦਰਗਾਹ ਚੱਲੈ ਨਾਨਕ ਨੇ ਨਜ਼ਰੀ ਪਾਈ ਹੈ ਇਹ ਇਹੀ ਕਿਰਪਾ ਸੀ ਇੱਥੇ ਤੱਕ ਕਿਰਪਾ ਨਾਲ ਪ੍ਰਾਪਤੀ ਹੋਈ ਹੈ ਦਰਗਾਹ ਚੱਲਣਾ ਉਹ ਰਾਹੇ ਮਾਣ ਵਾਲੀ ਜਿਸ ਨਾਲ ਦਰਗਾਹ ਨੂੰ ਚੱਲਾਂਗੇ ਇੱਥੋਂ ਗਾਹਾਂ ਦਾ ਸਫ਼ਰ ਤਾਂ ਹੋਊਗਾ ਇੱਥੋਂ ਅੱਗੇ ਨਾਮਣਾ ਸਫ਼ਰ ਸ਼ੁਰੂ ਠੀਕ ਹੈ ਤੇ ਬੋਇਥਾ ਜਿਹੜਾ ਵਰਤਿਆ ਸ਼ਬਦ ਇਹ ਗਿਆਨ ਵਾਸਤੇ ਵਰਤੇ ਜੀ ਹਾਂ ਹਾਂ ਗਿਆਨ ਵਾਸਤੇ ਗੁਰਮਤਿ ਗਿਆਨ ਵਾਸਤੇ ਠਾਕ ਨ ਸੱਚੇ ਬੋਇਥੇ ਜੇ ਗੁਰਤੀ ਰੱਖਦੇ ਇੱਥੇ ਵੀ ਗੁਰਦੀ ਗੱਲ ਹੋ ਰਹੀ ਹੈ ਤਿੱਤ ਦਰ ਜਾਏ ਉਤਾਰਿਆ ਗੁਰ ਦੀ ਸੇ ਸਾਵਧਾਨ ਇਹ ਵੀ ਗੁਰਦੀਓ ਗੱਲ ਹੋ ਜੀ ਗੁਰਦੀਓ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖੀ ਸੱਚ ਕਮਾਈ ਸੱਚੇ ਤਖਤ ਬੈਠਾ ਨਿਉਂ ਕਰ ਸਤ ਸੰਗਤੀ ਮੇਲ ਮਿਲਾਈ ਐਸਾ ਰਾਜ ਹੈ ਜਿੱਥੇ ਕੋਈ ਨਹੀਂ ਨੇ ਚਿੰਤਾ ਕੰਟਕ ਹੁੰਦਾ ਚਿੰਤਾ ਦੇ ਕੰਡੇ ਸੂੜਾਂ ਚ ਨੇ ਲੇੜੀਆਂ ਅੰਦਰ ਚਿੰਤਾਵਾਂ ਵੇਖ ਅੰਤਕ ਰਾਜਪੁੰਛਤੂ ਅਵਨਾਸ਼ੀ ਰਾਜਕਾਰ ਇੱਥੇ ਬੈਠ ਕੇ ਹੁਣ ਚਿੰਤਾ ਦਾ ਰਾਜ ਚੁਗਲ ਬੜੇ ਬੜੇ ਜੇ ਦੀਸੇ ਲੋਕ ਇਤਨੇ ਬਿਆਪਾ ਚਿੰਤਾ ਰੋ ਜਿਹੜਾ ਰਾਜਾ ਵੀ ਹੈ ਨਾ ਦੁਖੀ ਆ ਉਹ ਵੀ ਦੁਖੀ ਹੈ ਦੁੱਖ ਰਹਿਤ ਰਾਜ ਹੈ ਹੈ ਅਵਨਾਸ਼ੀ ਰਾਜ ਪੁੰਛਤੂ ਗਰਮਖਈ ਸੱਚੀ ਕਮਾਈ ਗਰਮਖਾਨੀ ਸੱਚੀ ਕਮਾਈ ਹੈ ਸੱਚੀ ਕਮਾਈ ਕਰ ਸੱਚ ਖਾਣਾ ਸੱਚ ਕਹਿਣਾ ਕਰ ਸੱਚ ਖਾ ਤੇ ਸੱਚ ਪਹਿਨ राजकर अविनाशी भाई सच्चे तख्त बैठा न्याऊ कर सत संगती मेल मिलाई सच्चे तख्त बैठा अपने हृदय विच तक के न्याऊ कर सच बोल सच नु सच झूठ नु झूठ कहि जा किसे दी कोई परवाह ना कर किसे दी चिंता ना कर बटे तो बड़ा कोई राजा या, या भी कोई भी है चाहे चाहे हिंदू वाला तुर्कू खाना भी कहना पड़ कह, कह दे कोई परवाह नहीं कह रहे ਜਦੋਂ ਰਹਣਗੇ ਨਿਉਂਕਾਰ ਸਤ ਸੰਗਤੀ ਮੇਲ ਮਲਾਈ ਸਤ ਸੰਗਤੀ ਜਿਹੜੇ ਸਤ ਸੰਗਤੀ ਨੇ ਉਹਨਾਂ ਦਾ ਮੇਲ ਮਲਾਉਂਦਾ ਰਹਾ ਨੂੰ ਗੁਰੂ ਨਾਲ ਜੋੜਦਾ ਰਹਾ ਜਿਹੜੇ ਸਤ ਸੰਗਤ ਕਰਨ ਵਾਲੇ ਨੇ ਉਹਨਾਂ ਨੂੰ ਗੁਰਮਖਾਨ ਨੂੰ ਇੱਕ ਜਗ੍ਹਾ ਨਾਲ ਜੋੜਦਾ ਇੱਕ ਸੰਗਤ ਬਣਾ ਲੇ ਉਹ ਵੀ ਨਿਰਪੈ ਦੇਖ ਕੇ ਨਿਰਪੈ ਹੋ ਜਾਣਾ ਆਪਣੇ ਇੱਕ ਚੇਨ ਬਣਾ ਲੈਣ ਆਪਣੇ ਇਕੱਠੇ ਹੋ ਕੇ ਜੁੜ ਜਾਣ ਜਥੇਵਰਦੀ ਬਣਾ ਲੈਣ ਹਾਂਜੀ सच्चा उपदेश हर जापणा हर सियों बन आई ऐथे सुख दाता मन अंत होए सिखाई सच्चा उपदेश हर मन हर जापणा सच्चे उपदेश दे हर प्रत्यक्ष रूप दे दर्शन हो जांदे ने जापणा जापणा होए जपजंद सिखजंद जांदे समझ आ जांदी है हर जापणा जापणा नहीं है जापणा हर सियों बन ਜਦ ਹਰ ਚੋਂ ਬਾਣਾ ਹੀ ਹਰ ਪਾ ਲਿਆ ਜਦ ਹਾਲ ਦੀ ਪ੍ਰਾਪਤੀ ਹਾਲ ਤੱਕ ਪਹੁੰਚ ਗਿਆ ਤੇ ਹਰਸੋਂ ਬਾਣਾ ਹੀ ਉਹਦੇ ਨੇ ਬਾਣਾ ਹੀ ਉਹਦਾ ਉਹਦੇ ਨਾਲ ਕੋਈ ਵਿਰੋਧ ਗੱਲ ਤੇ ਆ ਜਾਂਦਾ ਜਾਂ ਪਾਣੇ ਚ ਆ ਗਿਆ ਤੇ ਪਾਣੇ ਚ ਲੱਣ ਹੱਤੇ ਪਾਣਾਈ ਹੈ ਗਿਆ ਜਦ ਅੱਬੇ ਪਾਣਾਈ ਮਨ ਵਸ ਹੈ ਹੰਤ ਕੋਈ ਸਿਖਾਈ ਇੱਥੇ ਜਨਜਰ ਜ਼ਿੰਦਗੀ ਦਾ ਸੁੱਖ ਦਾਤਾ ਮਨ ਵਿੱਚੋਂ ਸੈਂਦਾ ਅੰਤ ਬੇਲੇ ਸਖਾਈ ਹੁੰਦਾ ਨਾਲ ਲੈ ਜਾਂਦਾ ਆਪਣੇ ਹਾਂਜੀ ਹਰਿ ਸਿਓ ਪ੍ਰੀਤ ਉਪਜੀ ਗੁਰ ਸੋਜੀ ਪਾਈ ਹਲ ਜਪਰੇਤ ਉਪਜੀ ਗੁਰ ਸੋਜੀ ਪਾਈ ਹਰਦੇ ਨਾਲ ਪ੍ਰੀਤ ਪੈਦਾ ਹੋ ਗਈ ਇਹ ਗੁਰਬਾਣੀ ਦੇ ਸੋ ਜਿੱਦਤੀ ਸਾਨੂੰ ਹਰ ਸਿਓ ਪ੍ਰੀਤ ਹੋਣੀ ਸੀ ਹੋ ਗਈ ਹਰ ਜੀ ਸਮਝ ਆਉਣੀ ਸੀ ਉਹ ਆ ਹਾਂਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ